बुधवार आपे बुद्धसार गुरुमुखी करनी शब्द विचार हां जी बुधवार बुधवार ता है ये आपने बुद्धसार बुद्ध जे बुद्ध प्राप्त कर लिए जी तो बुद्धि सार होगी बुधवार फिर बुद्धि तो कुछ बुद्धि दी, दी बात ये मंदी बारी खत्म होगी ਜਿੰਨਾ ਜਰ ਮਨਮੁੱਖਾ ਮੰਦੀਵਾਰੀ ਹੈ ਜਾਂ ਬੁੱਧੀ ਅਗਵਾਈ ਦਿੰਦੀ ਹੈ ਬੁੱਧਵਾਰ ਹੈ ਬੁੱਧੀ ਦੇ ਪਿੱਛੇ ਚੱਲਦਾ ਮਨ ਫਿਰ ਬੁੱਧਵਾਰ ਹੈ ਜੇ ਬੁੱਧੀ ਦੇ ਪਿੱਛੇ ਨਹੀਂ ਜਾਂਦਾ ਤੇ ਫਿਰ ਜਮਨਮਨ ਹੈ ਮਨਮੁੱਖ ਹੈ ਗੁਰਮੁਖ ਜਿਹੜਾ ਹੈਗਾ ਉਹਦੇ ਅੰਦਰ ਬੁੱਧਵਾਰ ਵਾਸਤੇ ਬੁੱਧਵਾਰ ਹੈ ਕਿਉਂਕਿ ਉਹਦੇ ਕੋਲ ਸਾਰਬੁੱਧ ਹੈ ਗੁਰਮੁਖ ਦੀ ਸਾਰਬੁੱਧ ਹੈ ਸਾਰਬੁੱਧ ਵਾਲੇ ਵਾਸਤੇ ਹੀ ਬੁੱਧਵਾਰ ਹੈ ਗੁਰਮਖ ਕੋ ਕਹੋਣਾ ਗੁਰਮਖੀ ਗੁਰਮਖ ਹੈ ਬੁੱਧੀ ਆਉਂਦੀ ਹੈ ਕਰਨੀ ਸ਼ਬਦ ਵਿਚਾਰ ਉਸ ਬੁੱਧੀ ਦੇ ਕਰੂ ਕਰਕੇ ਜੇ ਸਾਰਬੋਧ ਹੈ ਸ਼ਬਦ ਵਿਚਾਰ ਕਰਦਾ ਹੈ ਜੇ ਸਾਰਬੋਧ ਨਹੀਂ ਹੈ ਸ਼ਬਦ ਵਿਚਾਰ ਨਹੀਂ ਕਰਦਾ ਹੋਰ ਕੁਝ ਕਰਦਾ ਹਨ ਨਾਮ ਰਤੇ ਮਨ ਨਿਰਮਲ ਹੋਏ ਹਰ ਗੁਣ ਗਾਵੈ ਹੋ ਮੈਂ ਮਲ ਖੋਇ। ਸ਼ਾਮ ਰੱਤੇ ਨਾਮ ਦਾ ਰੰਗ ਜਦੋਂ ਚੜ ਜਾਂਦਾ ਨਾ ਸ਼ਬਦ ਵਿਚਾਰ ਕਰਦੇ ਕਰਦਿਆਂ ਨੂੰ ਤਾਂ ਮਨ ਨਰਮਲ ਹੋ ਜਾਂਦਾ ਹੈ। ਮੰਦੀ ਮਾਇਰ ਦੂਰ ਹੋ ਜਾਂਦੀ ਹੈ। ਹਰ ਗੁਣ ਗਾਵਾ ਹੋ ਮਲ ਖੋਇ। ਉਹਦੇ ਬਾਅਦ ਕਿੱਡੇ ਜਿਹਾ ਨਿਰਮਲ ਹੋ ਜਾਂਦਾ ਮਨ। ਉਹਦੇ ਬਾਅਦ ਹਰ ਗੁਣ ਗਾਉਣ ਦਾ ਨੰਬਰ ਆਉਂਦਾ ਫਿਰ ਗੁਰਬਾਣੀ ਲੱਗਦਾ ਹੈ। ਗੁਰਬਾਣੀ ਬੋਲਦਾ ਹਰ ਗੁਣ ਗਾਵਾ ਹੋ ਮਲ ਖੋਇ। ਹੋ ਮੇਰੀ ਮਾਇਰ ਜਦੋਂ ਖੋਈ ਜਾਂਦੀ ਹੈ ਅੰਦਰੋਂ। ਹੋਮੇ ਦੀ ਨਾਲ ਖਤਮ ਹੋ ਜਾਂਦੀ ਹੈ ਜਦੋਂ ਉਹ ਹੋਮੇ ਮਿੱਟੀਾਂ ਦੇ ਅੰਦਰੋਂ ਫਿਰ ਗੁੰਗਾਂ ਆਵੇ ਦਾ ਨੰਬਰ ਆਉਂਦਾ ਹੋਮੇ ਕਾ ਆਪਣੀ ਕਹਿਣਾ ਮੇਰੇ ਹੀ ਗੁੰਗ ਲੋਗ ਮੈਂ ਉਹ ਬੜਾ ਹਾਂ ਸਾਰੇ ਮੈਨੂੰ ਬੜਾ ਮੰਨਣ ਜਦੋਂ ਹੋਮੇ ਚਲੀ ਜਾਂਦੀ ਹੈ ਸਭ ਤੋਂ ਛੋਟਾ ਬਣਦਾ ਦਾਸ ਬਣਦਾ ਫਿਰ ਗੁੰਗ ਹੋਣ ਉਹ ਮੈਨਾਂ ਨਹੀਂ ਕਹਿੰਦੇ ਗੁੰਗ ਹੋਣ ਹਾਂਜੀ ਸਦ ਸੋਭਾ ਪਾਏ ਨਾਮ ਰਤੇ ਗੁਰ ਸ਼ਬਦ ਸੁਹਾਏ ਜੇ ਗੁਣ ਗਾਉਂਦਾ ਜਿਨ੍ਹਾਂ ਨੇ ਗੁਣ ਗਾਇਨ ਕੀਤਾ ਪਤਾਨੇ ਸਕੇ ਦਾਸ ਤੇ ਸਦਾ ਵਾਸ ਤੇ ਸੋਭਾ ਪਾਉਂਦੇ ਨੇ ਸੋਭਾ ਪਾਉਂਦੇ ਨੇ ਸੋ ਹੋ ਜਾਂਦੇ ਨੇ ਉਹ ਸਦਾ ਵਾਸ ਤੇ ਸੱਚਖੰਡ ਦੇ ਵਾਸੀ ਹੋ ਜਾਂਦੇ ਨੇ ਨਾਮ ਰਤੇ ਗੁਰ ਸ਼ਬਦ ਸੁਹਾਏ ਨਾਮ ਦਾ ਰੰਗ ਚੜਿਆ ਹੁੰਦਾ ਉਹਨਾਂ ਦੇ ਮੂੰਹ ਦੇ ਵਿੱਚੋਂ ਗੁਰਦੇ ਸ਼ਬਦ ਗੁਰਬਾਣੀ ਨਿਕਲਦੀ ਹੈ ਜਿਦਾਂ ਕਿ ਉਹ ਮੂੰਹ ਸੋਹਣੇ ਲੱਗਦੇ ਨੇ ਮੂੰਹ ਸੌਂਦੇ ਕਿਉਂਦੇ ਤੇਰਾ ਮੁਖ ਸੁਹਾਵਾ ਜਿਓ ਸਾਇਜ ਬਾਣੀ ਜਿਨ੍ਹਾਂ ਵਿੱਚੋਂ ਮਨ ਕਰ ਜਾਂਦਾ ਮੂੰਹ ਤੋਂ ਗੁਰਬਾਣੀ ਉਚਾਰਦਾ ਹਾਂਜੀ ਇੱਥੇ ਚੌਥੀ ਪਾਉਣੀ ਸਮਾਪਤੀ ਹੈ ਜੀ ਜੀ ਲਾਹੇ ਨਾਮ ਪਾਏ ਗੁਰਦੁਆਰ ਆਪੇ ਦੇਵ ਦੇਵਨਹਾਰ ਲਾਹ ਨਾਮ ਪਾਇ ਗੁਰਦੁਆਰ ਜਦੋਂ ਹਿਰਦੇ ਚਿੱਟੇ ਗਿਆ ਰੰਗਾ ਗੁਰਦੁਆਰਾ ਕੀ ਗੁਰਦੁਆਰਾ ਅੱਪੇ ਦੇਵਾ ਦੇਵ ਹਰ ਨਾਮ ਨੂੰ ਮਿਲਦਾ ਹੈ ਲਾ ਨਾਮ ਦਾ ਮਿਲਦਾ ਹੈ ਤੇ ਦੇਣ ਹਾਰਾ ਦੰਦਾ ਪਰਮੇਸ਼ਰ ਦੰਦਾ ਤੇ ਇਹਨੂੰ ਨਾਮ ਮਿਲਦਾ ਹੈ ਉੱਥੇ ਤਾਂ ਸ਼ਬਦ ਵਿਚਾਰ ਕਰਦਾ ਉੱਥੇ ਸਾਰੀ ਸੋਝੀ ਮਿਲਦੀ ਹੈ ਉਹ ਗੱਲਾਂ ਮਿਲਦੀਆਂ ਨੇ ਜਿਹੜੀਆਂ ਸੋਚਿਆ ਵੀ ਨਹੀਂ ਜਾ ਸਕਦੀਆਂ ਗੁਰਬਾਣੀ ਦੇ ਉਹ ਪੇਤ ਖੁੰਦੇ ਨੇ ਜਿਹੜੇ ਸੋਚੇ ਵੀ ਨਹੀਂ ਜਾ ਸਕਦੇ ਹਾਂਜੀ ਜੋ ਦੇਵਾ ਤਿਸ ਕੋ गुरप्रसादी आप गवाइए है, है, है आप गवाइए है, है खत्म कर लेईदा है अपनी होमे बिल्कुल नष्ट कर लेई अपना आपा खत्म करना अपनी इच्छा खत्म कर लेनी अपनी कोई इच्छा नहीं रहण गई ਗਿਆਨ ਦੀ ਜਦ ਗਿਆਨ ਦਾ ਪ੍ਰਸਾਦ ਮਿਲਦਾ ਤਾਂ ਇੱਛਾ ਅਨੁਸਾਰੀ ਹੀ ਦੇਵਨ ਹਾਰੇ ਕਉ ਜੈਕਾਰ ਨਾਨਕ ਦਾ ਨਾਮ ਨੂੰ ਇਹਦੇ ਧਾਂ ਕਰਕੇ ਰੱਖੋ ਉਹ ਦੇਵਨ ਦਾ ਜੈਕਾਰ ਕਰਦੇ ਰਹੋ ਉਹਦੀ ਧੁਕਾ ਕਰਦੇ ਰਹੋ ਜੋ ਨਾਮ ਨਾਲ ਜੋ ਤੇਰੀ ਮਰਜ਼ੀ ਆ ਉਹ ਤਾਂ ਸਾਹਮਣੇ ਹਿਰਦੇ ਚ ਟਿਕਾ ਕੇ ਰੱਖੋ ਜੋ ਨਾਮ ਤੁਹਾਨੂੰ ਮਿਲ ਗਿਆ ਉਹਨੂੰ ਤਾਂ ਸਾਹਮਣੇ ਰੱਖੋ ਹਿਰਦੇ ਚ ਉਹ ਦੇਵਨ ਹਾਲਾ ਜਿਹੜਾ ਦੇ ਰਿਹਾ ਉਹਦੀ ਜਾਜਾ ਕਰ ਕਰਦੇ ਰਹੋ ਉਹਦੇ ਗੁਣ ਗਾਇਨ ਇਸ ਰਚਨਾ ਵਿੱਚ ਨਾਨਕ ਨਾਮ ਆਇਆ ਪੰਜਵਾਂ ਪਦ ਹਾਂਜੀ ਵੀਰਵਾਰ ਵੀਰ ਭਰਮ ਭੁਲਾਏ ਪ੍ਰੇਤ ਭੂਤ ਸਭ ਦੂਜੇ ਲਾਏ ਆਪ ਉਪਾਏ ਕਰ ਵੇਖੇ ਵੇਖਾ ਸਭਨਾ ਕਰਤੇ ਤੇਰੀ ਟੇਕਾ ਵੀਰ ਭਰਮ ਭੁਲਾਏ ਆ ਬੜੇ ਬੜੇ ਸੂਰਮੇ ਨੇ ਕਹੋਂਦੇ ਨੇ ਨੇ ਵੀਰ ਤਾਂ ਹੰਕਾਰ ਦਾ ਪ੍ਰਤੀਕ ਹੈ ਹੰਕਾਰ ਦਾ ਪ੍ਰਤੀਕ ਵੀਰ ਹੰਕਾਰ ਦਾ ਪ੍ਰਤੀਕ ਹੈ ਪਾਣਾ ਤਾਂ ਮੰਦ ਹੈ ਸਾਰਿਆਂ ਦੇ ਰਾਜ ਕਰਨਾ ਚਾਹੁੰਦਾ ਦਸ਼ਮ ਪਾਸ਼ਾ ਕਹਿ ਰਹੇ ਨੇ ਭਈ ਜੀ ਤੇ ਮੇਰੀ ਕਿਰਪਾ ਨਾਲ ਕੇਰੀ ਉਹ ਨਹੀਂ ਕਹ ਰਿਹਾ ਅਸੀਂ ਬਹਾਦਰ ਸੀ ਮੈਨੂੰ ਸੂਰਮਿਆਂ ਜਿੱਤ ਪ੍ਰਾਪਤ ਕੀਤੀ ਆ ਮੈਂ ਕੀਤੀ ਉਹ ਕਹਿੰਦਾ ਭਾਈ ਜਿੱਤ ਮੇਰੀ ਦੁਨੀਆ ਦਾ ਭਾਵੇਂ ਮੇਰੀ ਜਿੱਤ ਕਹਿੰਗੇ ਪਰ ਕਿਰਪਾ ਖਾਲ ਕਿਹੜੀ ਪਰਮੇਸ਼ਰ ਕਰਪਾ ਤੇਰੀ ਹੋਈ ਸੀ ਇਹ ਵੀਰ ਨਹੀਂ ਬਣੇ ਜਿਹੜੇ ਵੀਰ ਬਹਾਦਰ ਬਣਦੇ ਨੇ ਉਹ ਧਰਮ ਦੇ ਵਿੱਚ ਨੇ ਉਹ ਕੀਨੇ ਪ੍ਰੇਤ ਭੂਤ ਨੇ ਸਭ ਦੂਜੇ ਲਾਏ ਉਹ ਜਿਉਂਦਾ ਹੀ ਪ੍ਰੇਤ ਭੂਤ ਨੇ ਜਿਹੜਾ ਧਰਮ ਦੇ ਵਿੱਚ ਹੈ ਮਾਇਆ ਮੋਹ ਦੇ ਵਿੱਚ ਜਿਹੜਾ ਫਸਿਆ ਆਇਆ ਉਹ ਪ੍ਰੇਤ ਕਹਿੰਦੇ ਨੇ ਉਹ ਮਾਇਆ ਮੋਹ ਪ੍ਰੇਤ ਹੈ ਜਿਹੜਾ ਸਰੀਰ ਕਰਕੇ ਆਪਣੇ ਆਪ ਦੀ ਹੋਂਦ ਨੂੰ ਸਰੀਰ ਬਣਦਾ ਹੈ ਸਰੀਰ ਕਰਕੇ ਜਿੱਤ ਪ੍ਰਾਪਤ ਮੰਨਦਾ ਸਰੀਰ 'ਤੇ ਤਲਵਾਰਾਂ ਫੜੀਆਂ ਬਾਹਾਂ ਚੱਲਦੀਆਂ ਨੇ ਫਰੀਡ ਚੱਲਦਾ ਲੱਤਾਂ ਚੱਲਦੀਆਂ ਨੇ ਉਹ ਆਪਣੇ ਸਰੀਰ ਚੱਲਦਾ ਕਹਿੰਦਾ ਮੈਂ ਜਿੱਤੇ ਜੰਗ ਮੈਂ ਜਿੱਤੀ ਹੈ ਉਹ ਪੂਤ ਪ੍ਰੇਤ ਉਹਨਾਂ ਨੂੰ ਪੂਤ ਪ੍ਰੇਤ ਮੰਨਦੇ ਨੇ ਆਪ ਉਪਾਏ ਕਰ ਵੇਖਿਆ ਵੇਖਾ ਸਭਨਾ ਕਰਤੇ ਤੇਰੀ ਟੇਕਾ ਉਹ ਕਹਿੰਦਾ ਪੈਦਾ ਕਰ ਕੀਤੇ ਨੇ ਇਹਨਾਂ ਨੂੰ ਪੈਦਾ ਕਰਕੇ ਵੱਖਰੇ ਵੱਖਰੇ ਦੇਖ ਰਿਹਾ ਤੂੰ ਸਾਰਿਆਂ ਨੂੰ ਆ ਦੱਡ ਵੇਖਾ ਸਭਨਾ ਕਰਤੇ ਤੇਰੀ ਟੇਕਾ ਪਰ ਇੱਕ ਗੱਲ ਜ਼ਰੂਰ ਹੈ ਫੇਰ ਵੀ ਤੇਰੀ ਟੇਕ ਸਾਰੇ ਇੱਥੇ ਤੋਂ ਸਾਰੇ ਮੰਗਦੇ ਨੇ ਕੁਝ ਨਾ ਕੁਝ ਕਾਹੇ ਕੱਢਾਈ ਆਪਣੇ ਆਪ ਨੂੰ ਸੂਰਮੇ ਮੰਨਦੇ ਹੁਣ ਪਰ ਤੇਰੇ ਆਗੇ ਅੱਗੇ ਫੇਰ ਵੀ ਉਹ ਜਰੂਰ ਮੰਗਦੇ ਨੇ ਹਾਂਜੀ ਜੀ ਜੰਤ ਤੇਰੀ ਸ਼ਰਨ ਆਈ ਸੋ ਮਿਲੈ ਜਿਸ ਲਹਿ ਮਿਲਾਈ ਜੀ ਜੰਤ ਸਾਰੇ ਤੇਰੀ ਛਾਣ ਨੇ ਉਹ ਤਾਂ ਮੰਨ ਲੈਂਦੇ ਨੇ ਉਹ ਤਾਂ ਇਹ ਵੀ ਮੰਨ ਲੈਂਦੇ ਨੇ ਵੀ ਭਾਈ ਉਹੀ ਆ ਸਾਡਾ ਐਕਚੁਅਲੀ ਜੀ ਜੰਤ ਤੇਰੀ ਛਾਣ ਵਿੱਚ ਨੇ ਤੇਰੇ ਹੁਕਮ ਵਿੱਚ ਨੇ ਸੋ ਮਲੇ ਜਿਸ ਲਹਿ ਮਿਲਾਈ ਉਹ ਮਿਲ ਜਾਂਦਾ ਤੇਰੇ ਨਾਲ ਜਿਹਨੂੰ ਤੂੰ ਬੁਲਾ ਲਵੇਂ मेरी आगे अगर कोई नहीं मिल सकता अपनी शक्ति ना कोई नहीं मिल सकता कोई माड़ा घेर के हट करके कोई नहीं मिल सकता हटकरम भी बहुत ने उतना ना मिल सकता कोई ऐठे पदरी समाप्ति है जी